ਲੋਕ ਮਹਲਾ ਦੂਜਾ ਆਪੇ ਜਾਣਾ ਕਰੇ ਆਪ ਆਪੇ ਆਣੇ ਰਾਸ ਤਿਸੇ ਅੱਗੇ ਨਾਨਕਾ ਥਲੇ ਕੀਚੇ ਅਰਦਾਸ ਆਪੇ ਜਾਣਾ ਕਰੇ ਆਪ ਆਪੇ ਆਣੇ ਰਾਸ ਜੇ ਆਪੇ ਜਾਣੂਗਾ ਤਾਂ ਆਪੇ ਕਰੂਗਾ ਕਰਨਾ ਵੀ ਆਪ ਰੂ ਕਰਨਾ ਗਿਆਨ ਵੀ ਆਪੇ ਲੈਣਾ ਉਹ ਕਰੂ ਵੀ ਆਪੇ ਕਰਨਾ ਗੁਰੂ ਆਪੇ ਆਣਾ ਰਾਸ ਆਪਣੇ ਮਨ ਨੂੰ ਰਾਖਲੀ ਆਪੇ ਕਰਨਾ ਇਹ ਨਹੀਂ ਹੈਗਾ ਮਨ ਨੂੰ ਰਾਸ ਆਪ ਹੀ ਕਰਨਾ ਆਪਣੇ ਮਨ ਨੂੰ ਆਪੇ ਮਰੋ ਦੇਖਣਾ ਨਹੀਂ ਮਨਾਉਣਾ ਮਨ ਨੂੰ ਆਪਣੇ ਨੂੰ ਜਿਵੇਂ ਅਗੇ ਨਾਨਕਾ ਖਾਲਸਾ ਜੀਏ ਅਰਦਾਸ ਅਰਦਾਸ ਵੀ ਆਪੇ ਕਰ ਲਈਏ ਪਰਮੇਸ਼ਰ ਦੇ ਜੇ ਤੂੰ ਜਿਹੜਾ ਹੈ ਸਾਡੀ ਸਹਾਇਤਾ ਕਰ ਮੇਰੀ ਸਹਾਇਤਾ ਕਰ ਆਪਣੇ ਆਪ ਨੂੰ ਪਹਿਲਾਂ ਜਾਣਨਾ ਹੈ ਜੀ ਕਰੇ ਆਪ ਆਪਣੇ ਮਨ ਨੂੰ ਫਿਰ ਰਾਸ ਨਿਕਲਣਾ ਵੰਡੂ ਰੋਣਾ ਨਹੀਂ ਠੀਕ ਹੈ ਜੀ ਆਪਣੇ ਆਪੇ ਪ੍ਰੇਮ ਦੀਆਂ ਡੋਰੀਆਂ ਪਾ ਕੇ ਉਹ ਹੋ ਗਏ ਨੇ ਤੇ ਹੋ ਜੂਏ ਠੀਕ ਹੈ ਜੀ ਤਿਸੇ ਅੱਗੇ ਨਾਨਕਾ ਦਾ ਆਹ ਖੜਕੇ ਉਹਦੇ ਅੰਦਰ ਰੁਕ ਕੇ ਮਨ ਰੁਕੂਗਾ ਤਵੀਰ ਅਰਦਾਸ ਕਰੂਗਾ ਜੇ ਮਨ ਨਹੀਂ ਰੁਕਦਾ ਤਨ ਉਹਦਾ ਅਰਦਾਸ ਹੈ ਕਿ ਕਿਰਨ ਇਹਦਾ ਭੱਜਿਆ ਫਿਰਦਾ ਜੀ ਅਰਦਾਸਾਂ ਕਰਦਾ ਮਾਇਆ ਨਾਲ ਜੁੜਿਆ ਹੋਇਆ ਮਾਇਆ ਵੀ ਭੱਜੀ ਫਿਰਦੀ ਆਪ ਵੀ ਭੱਜਿਆ ਫਿਰਦਾ ਜੇ ਰੁਕ ਜੇ ਤਾਂ ਮਾਇਆ ਨਾਲ ਅਲੱਗ ਹੋ ਜਾਂਦਾ ਹੈ ਰੁਕੀ ਜਾਂ ਲੈ ਗਈ ਵਜੂਦ ਦੀ ਨਾਲ ਉਹਦਾ ਆਪਣੇ ਊਰਜੇ ਬਣ ਜਾਂਦੀ ਹੈ ਜੇ ਰੁਕ ਕੇ ਜੇ ਵੀ ਮਨ ਖੜ ਜਾਂਦਾ ਮਾਇਆ ਨਾਲ ਦੁੱਤ ਕੇ ਆਪਣੇ ਊਰਜੇ ਜਿ ਜਾਂਦਾ ਕਿਹਨ ਦੋ ਹੱਥ ਜੁੜਦੇ ਨੇ ਦੋ ਹੱਥ ਫੇਰ ਜੁੜਦੇ ਨੇ ਫਿਰ ਅਰਦਾਸ ਹੁੰਦੀ ਐ ਦੋਏ ਕੱਲ ਜੋੜ ਆਪੇ ਰੋਕਣਾ ਹੋਰ ਕੌਣ ਰੋਕੂਆ ਰੁਕਿਆ ਐ ਫਿਰ ਅਰਦਾਸ ਹੋਈ ਮਹੱਲਾ ਪਹਿਲਾ ਜਿਨ ਕੀਆ ਤਿਨ ਦੇਖਿਆ ਆਪੇ ਜਾਣੈ ਸੋਏ ਕ੍ਰਿਸ਼ਨ ਕਹੀਏ ਨਾਨਕਾ ਜਾ ਘਰ ਵਰਤੈ ਸਭ ਕੋਈ ਜਿਵੇਂ ਉੱਪਰ ਜਿਹਨਾਂ ਨੇ ਜੋ ਕੀਤਾ ਆਪਣਾ ਮਨ ਰੋਕਿਆ ਆਪ ਉਹਨਾਂ ਨੇ ਦੇਖ ਲਿਆ ਸਾਰਾ ਵਿਆਹ ਪਤਾ ਲੱਗ ਗਿਆ ਸਭ ਉਹਨਾਂ ਨੇ ਸਭ ਕੁਝ ਦੇਖ ਲਿਆ ਆਪਣੇ ਅੰਦਰ ਹੀ ਆਪਣਾ ਆਪਾ ਦੇਖ ਲਿਆ ਆਪਣਾ ਮੂਲ ਵੀ ਦੇਖ ਲਿਆ ਇਹਨੂੰ ਦੇਖਿਆ ਆਪੇ ਜਾਣੇ ਥੋਈ ਉਹ ਆਪਣੇ ਆਪ ਨੂੰ ਆਪੇ ਜਾਣਦਾ ਹੈ ਕਿਸ ਨੂੰ ਕਹੀਏ ਨਾਨਕਾ ਜਾ ਘਰ ਵਰਤੈ ਸਭ ਕੋਈ ਉਹਨੂੰ ਦੱਸਣ ਪੁੱਛਣ ਦੀ ਕੀ ਲੋੜ ਹੈ ਪਰ ਕਿਉਂ ਕੀ ਕਹਿਣਾ ਕੌਣ ਗੁਰੂ ਆ ਕੌਣ ਚੇਲਾ ਹੈ ਇਹ ਤਾਂ ਇੱਕੋ ਹੀ ਹੋ ਗਿਆ। ਸਈਆਂ ਨਾਨਕਾ ਜੀ ਕਹਾਰੇ ਵਰਤਿਆ ਸਭ ਕੋਈ। ਜਿਵੇਂ ਅੰਦਰ ਇਹ ਸਭ ਕੁਝ ਵਰਤਦਾ। ਸਭ ਕੁਝ ਘਰ ਫਿਰ ਉਹਨੂੰ ਹੁਣ। ਘਰੇ ਹੀ ਹੈ ਸਭ ਕੁਝ। ਉਪਦੇਸ਼ ਦੀ ਲੋੜ ਨਹੀਂ। ਕਿਉਂਕਿ ਆਪ ਦੇਖੀਏ ਜਿਹਨੂੰ ਨਾਨਕ ਤੇਓ ਗਿਆਨ ਉਪਦੇਸ਼ ਦੀ ਲੋੜ ਨਹੀਂ ਰਹੀ ਥਰ ਨੇ ਆਪਣੇ ਅੰਦਰ ਸਭ ਕੁਝ ਦੇਖ ਲਿਆ, বুঝ ਲਿਆ, ਉਹਨੂੰ ਜਿਹੜਾ ਹੋ ਜੀ। ਹੋੜੀ ਸਭੇ ਧੋਖ ਵਿਚਾਰ ਕੋ ਮਿਤ ਕਰ ਮੰਤਨ ਹੋਏ ਨਿਹਾਲ ਪਾਪਾਂ ਦਹੈ ਹਰ ਸਾਰੇ ਧੋਖ ਦੁਖਾਰ ਕੇ ਸਾਰੇ ਜਿਹੜੇ ਨੇ ਮਾਇਆ ਦੇ ਧੰਦੇ ਸਾਰੇ ਦੁਖਾਰ ਕੇ ਆਪਣੇ ਗੁਰ ਨਾਮ ਵਿਚਰ ਦਾ ਪਾ ਲੈ। ਮੰਤਨ ਹੋਏ ਨਿਹਾਲ ਪਾਪਾਂ ਦਹੈ ਹਰ ਜਿਹੜਾ ਤੇਰਾ ਮੂਰ ਹਾਰਾ ਉਹ ਤੇਰੀ ਜਿਹੜੀ ਮਰਜ਼ੀ ਖੜਾ ਦਊਗਾ। ਜੇ ਤੂੰ ਨਿਹਾਲ ਮਾਰਤਾ ਨਿਹਾਲ ਹੋ ਜੂਗਾ ਮਨ ਕਰਕੇ ਤਨ ਕਰਕੇ ਨਿਹਾਲ ਹੋ ਜੂਗਾ ਜਾਨ ਕਰਦਾ ਆਵਣ ਜਾਣਾ ਚੁੱਕਾ ਜਨਮ ਨਾ ਜਾਏ ਮਰ ਸਤਿਨਾਮ ਆਧਾਰ ਸੋਗ ਨਾ ਮੋਹ ਜਰ ਜਾਣਾ ਫਿਰ ਜੋ ਕਰ ਖਤਮ ਹੋ ਜੂਗਾ ਉਹ ਨਾ ਤੇਰਾ ਮੂਲ ਸਾਥ ਹੁਕਮ ਨਾਲ ਆ ਰਹੂ ਹੁਕਮ ਨਾਲ ਜੁੜ ਜੇਗਾ ਸਾਚਨਾਮਾ ਹੋ ਜਾਣਾ ਉਹ ਸਾਚਨਾਮਾ ਆੜ ਆਦਾਰ ਲੋਗ ਨੂੰ ਹੋਏ ਯਾਰ ਮਜਰਾ ਰਹੋਗਾ ਨਾ ਹੋਗਾ ਕੋਈ ਸੰਤਾਪ ਸਾਚ ਆਦਾਰ ਹੋ ਦੋਖ ਦੁਖ ਸਾਭੂ ਵੇਗਾਂਗੇ ਜਿਆਨਾ ਮਨੋਂ ਸਭ ਕੁਝ ਮਿਟ ਜਾਊਗਾ ਨਾਨਕ ਨਾਮ ਨਿਧਾਨ ਮਨਮਹਿ ਸੰਜਤਰ ਨਾਨਕ ਦਾ ਸੰਤ ਨਾਮੁ ਲਗਾਣਾ ਜੜਾ ਜਿਹੜਾ ਸਤਿ ਗਿਆਨ ਮਨ ਦੇ ਸੰਗੀਤ ਅਰਮਣ ਦੇ ਵਿੱਚ ਇਕੱਠਾ ਕਰਕੇ ਰੂ ਨਾਲ ਸਾਰਾ ਜਗ ਬੋਰ ਬਾਣੀ ਦਾ ਇਹਨੂੰ ਅੰਦਰ ਵਸਾ ਲੈ ਆਪਣੇ ਨਾਲ ਨੂੰ ਅੰਦਰ ਬਾਣੀ ਠੀਕ ਹੈ ਜੀ ਇੱਥੇ 20ਵੀਂ ਪੌੜੀ ਦੀ ਸਮਾਪਤੀ ਹੈ ਜੀ